ਸ਼ਲੋਕ ਤਾਂ ਜੋ ਸਿਆਣਪੁਰ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮੰਨ ਰਖੋ ਨਾਨਕ ਦੁਖ ਭਰਮ ਭਉ ਜਾਏ ਹੁਣ ਜਿਹੜੇ ਹਾਜ਼ਰੀ ਦੇ ਵਿੱਚ ਬੈਠੇ ਨੇ ਗੁਰੂ ਸਾਹਿਬ ਦੇ ਉਹ ਸੁਰਜਣ ਨੇ ਦੇਵਤੇ ਨੇ ਜਿਹੜੇ ਮਨੁਸਤੇ ਜਿਹੜੇ ਸਾਹਮਣੇ ਬੈਠੇ ਨੇ ਦੇਵਤੇ ਨੇ ਉਹਨੂੰ ਸੁਰਜਣ ਕਹਿੰਦੇ ਨੇ ਸੁਰਜਣੋ ਇਹਨਾਂ ਨੂੰ ਉਹਦੇ ਤਾਂ ਪਰੋਖੀ ਉਸ ਅਦੋਰ ਦਿਨ ਰਾਤ ਜਿਹੜੇ ਹਾਜ਼ਰੀ ਬੈਠੇ ਸਮਝੀ ਚੋਦਾ ਦਿਲ ਤੇ ਹੀ ਉਹਨਾਂ ਨਾਲੇ ਗੱਲ ਹੋਵੇਗੀ ਉਹਨਾਂ ਨੂੰ ਹੀ ਸੰਬੋਧਨ ਕਰਿਆ ਤਾਂ ਆਪਣੀ ਜ਼ਾਨ ਛੱਡੀ ਨਹੀਂ ਇਹਨਾਂ ਨੇ ਗਿਆਨ ਬਨਾਈ ਛੱਡੀ ਉਹਨੂੰ ਨਾਮ ਨਹੀਂ ਪੜਦਾ ਜੋ ਗਿਆਨ ਤੋਂ ਸਿਮਰੋ ਹਰ ਰਾਇ ਰੋ ਹਰ ਰਾਇ ਜਿਹੜਾ ਹਰ ਰਾਇ ਹੈ ਨਾ ਪੂਰਨ ਪ੍ਰਭ ਉਹਦਾ ਜ਼ਿਕਰ ਕਰੋ ਕਿਉਂ ਕਰ ਉਹਦਾ ਜ਼ਿਕਰ ਸਿਮਰਨ ਸਿਮਰਨ ਕਰੋ ਜ਼ਿਕਰ ਚੇਤਾ ਕਰੋ ਪੂਰਨ ਪ੍ਰਭ ਐਸੀ ਤੁਸੀਂ ਤੁਹਾਡਾ ਅਤੀਤ ਰੂਪ ਉਹ ਹੈ ਥੋੜਾ ਟਾਰਗੇਟ ਪੂਰਾ ਬਣ ਇੱਕ ਹੋਣਾ ਇੱਕ ਕਰੂ ਜ਼ਿਕਰਨ ਕਰੋ ਉਹ ਇੱਕ ਜਿਹੜਾ ਸਾਡਾ ਟਾਰਗੇਟ ਆ ਉਹਦਾ ਕੋਣ ਹੈ ਇਹ ਆਜੁਗਮੇ ਇੱਕੇ ਕੋੜਾ ਏਡਾ ਜਦ ਹੋਊ ਅੰਦਰ ਵੀ ਬਾਹਰ ਵੀ ਹਾਂ ਇੱਕ ਆਸ ਹਰ ਮਨ ਰੱਖੋ ਨਾਲ ਭਰਮ ਪਾਉ ਜਾਏ ਇੱਕ ਆਸ ਰੱਖੋ ਬਸ ਹਰ ਪਰ ਰੱਖੋ ਹਰ ਜਿਹੜਾ ਆਪਣਾ ਹੂੜਾ ਉਹਦੇ ਤੇ ਆਸ ਰੱਖੋ ਉਹਦੀ ਆਸ ਰੱਖੋ ਇਹ ਆਸ ਹਰ ਵਣ ਰੱਖੋ ਕਿ ਜੋ ਵੀ ਕਾਜ ਸਵਾਰਨਾ ਹਲ ਦੇ ਦੇ ਸਵਾਰ ਜੋ ਸਾਡਾ ਖੋਇਆ ਦੇ ਜਿੰਨਾ ਵੀ ਕੰਮ ਆ ਸਾਡਾ ਹਲ ਬਾਕੀ ਗਾਂ ਉਹਦੇ ਤੇ ਆਸ ਰੱਖੋ ਨਾਨਕ ਦੁਖ ਭਰਮ ਭਾਉ ਜਾਇ ਕਹਿੰਦਾ ਦੁਖ ਜਦ ਤੁਹਾਡਾ ਦੂਰ ਹੋ ਭਰਮ ਦੂਰ ਹੋ ਜੂ ਭਾਉ ਦੂਰ ਹੋ ਜੂ ਤੁਸੀਂ ਹਰ ਦੇ ਇਤਿਹਾਸ ਕਰ ਲਈ ਆਪਣੇ ਮੂਰਤ ਇਤਿਹਾਸ ਕਰ ਲਈ ਅੰਤਰਤਿਆਨ ਹੋ ਗਏ ਸਾਰਾ ਦੁੱਖ ਪਰਮ ਭਉ ਖਤਮ ਆਸ਼ਟਪਦੀ ਦੇਖੋ ਦੁੱਖ ਦੇ ਖਤਮ ਹੋਣ ਨਾਲ ਸੰਤੋਖ ਹੁੰਦਾ ਪਰਮ ਭਉ ਦੇ ਨਾਲ ਨਾ ਹੁੰਦੇ ਚਾਰੇ ਪਦਾਰਥ ਮਿਲਦੇ ਨੇ ਫਿਰ ਚਾਰ ਪਦਾਰਥ ਮਿਲਣੇ ਗਲਤ ਦੁੱਖ ਤਾਂ ਜਾਂਦੇ ਨੇ ਜਦੋਂ ਰਨ ਸੰਤੋਖ ਹੋ ਗਿਆ ਦੋ ਘੋੜੇ ਦੂਰੋਂ ਦੇ ਦੋ ਸੋਕ ਬਰਾਬਰ ਮੰਨ ਲਿਆ ਘਾਟਾ ਵਾਧਾ ਕੋਈ ਪਰਵਾਹ ਨਹੀਂ ਭੁੱਖੀ ਤੱਕ ਕਿ ਕਿਦੂ ਭੁੱਖਾ ਨੇ ਭੁੱਖਾ ਹੋਈ ਦੋ ਘੋੜਾ ਦੋ ਜਿਹੜਾ ਹੈਗਾ ਉਹ ਗਾਹ ਮੇਰਾ ਭਰਮ ਗਿਆ ਗੁਰਪ੍ਰਸਾਦ ਭਰਮ ਦਾ ਨਾਸ ਤਨਾਸ ਹੋਣਾ ਉਹ ਪਰਮ ਹੋਣਾ ਜਾਂਦਾ ਹੈ